ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਮੰਡ ਖੰਡ ਬ੍ਰਹਮੰਡ ਖੰਡ ਬ੍ਰਹਮੰਡ ਦਾ ਹੈ ਜਿਹੜੇ ਅੱਛਾ ਜੀ ਬ੍ਰਹਮੰਡ ਦੇ ਦੋਟ ਕੁੜੇ ਜਿਹਸ ਤਾਰ ਮਾਨੂ ਇਹ ਨਾਮ ਦੇ ਧਾਰੇ ਦੇ ਰੋਗ ਦੇ ਆਸਰੇ ਦੇ ਆਸਰਾ ਆਸਰਾ ਲੈਣਾ ਅਰ ਆਸਰਾ ਦੇਣਾ ਅਧਾਰ ਤੋਂ ਧਾਰੇ ਬਣਨਾ ਹੁੰਦਾ ਨਾ ਅਧਾਰ ਕਿਹចੀ ਦਾ ਹਾਂਜੀ ਹੈ ਅਧਾਰ ਤੇ ਧਾਰੇ ਹੈ ਜਦ ਆਪਾਂ ਬਾਲਾ ਧਾਰਨ ਚੱਲਦੀ ਹਾਂ ਹਾਂ ਹਾਂ ਆਪਾਂ ਦਾ ਬਣ ਗਿਆ ਤੁਸੀਂ ਥੱਲੇ ਟਿਕ ਬੰਦੀ ਤੁਸੀਂ ਥੱਲੇ ਟਿਕ ਬੰਦੀ ਹਾਂਜੀ ਕਲਚਪਾਲੀ ਬਾਲਾ ਖੜੀ ਗੱਲ ਚ ਕੱਪੜੇ ਧਾਰਨ ਕਰ ਲੈ ਕੱਪੜੇ ਆਪਣੇ ਸਰੀਰ ਨਾਲ ਆਸਰੇ ਤੇ ਖੜੇ ਦੇ ਹਿੰਗੇ ਜੀ ਆਸਰਾ ਦੇਣਾ ਹੁੰਦਾ 40 ਅਰਥ ਅਰੰਭ ਕੀਤੇ ਹੋਏ ਨੇ ਨਾਮ ਨੇ ਦੇ ਆਸਰੇ ਖੜੇ ਨੇ ਸਾਰੇ ਅੱਛਾ ਜੀ ਦੋਏ ਟੁਕੜੇ ਆਤਮਾ ਔਰ ਪਰਾਤਮਾ ਨਾਮ ਦੇ ਆਸਰੇ ਹੀ ਦੇ ਵੈਸੇ ਤਾਂ ਕੋਈ ਹੈ ਦੋ ਤਾਂ ਕਹਿਣ ਦੀ ਗੱਲ ਹੈ ਹਾਂ ਇਹ ਕੋਈ ਆ ਕਿਉਂਕਿ ਇਹ ਜਿਹੜੀ ਕੋਈ ਜੋਤ ਖੜੀ ਹੈ ਬਲਬ ਖੜਾ ਹੈ ਬਲਬ ਕਿਸੇ ਦੀ ਨਾਲ ਖੜਾ ਹੈ ਜੋਤ ਬਲਬ ਦੇ ਆਸਰੇ ਖੜੀ ਹੈ ਇਹ ਬਲਬ ਉਹ ਤੋਂ ਕੇ ਪਰੇ ਲੈ ਜਾਵਾਂਗੇ ਜੋਤ ਆਪੇ ਨਾਲ ਚਲੀ ਜਾਊਗੀ ਜੋਤ ਵੀ ਉਸੇ ਦੀਵਾਰ ਦੇ ਆਸਰੇ ਖੜੀ ਹੈ ਜਿਹੜੀ ਦੀਵਾਰ ਦੇ ਆਸਰੇ ਬਲਬ ਖੜਾ ਜੇ دیوار ਹਿੱਲ ਜਾਂਦੀ ਹੈ ਉੱਥੋਂ ਜਾਂ ਦਰਵਾਜ਼ਾ ਡਰਜਰਦੀ ਹੈ ਤਾਂ ਦੋਇ ਡਿਸਟਰਬ ਹੋ ਜਾਂਦੇ ਨੇ ਜੀ ਜਿਹੜੀ ਜੋਤ ਹੈ ਉਹ ਵੀ ਜਿਹੜੀ ਜੋਤ ਹੈ ਉਹ ਵੀ ਦੋ ਹੀ ਤੋਜ ਲਾਰਡਰ ਚੱਕ ਕੇ ਲੈ ਜੀਏ ਕਿਤੇ ਲਾਈਟ ਨਾਲੇ ਚਲੀ ਜਾਂਦੀ ਹੈ ਖੰਡ ਬ੍ਰਹਮੰਡ ਦਾ ਆਸਰਾ ਦੋਸਤੀ ਦਾ ਨਾਮ ਦਾ ਆਸਰਾ ਨਾਮ ਦੇ ਆਸਰੇ ਖੜੇ ਨੇ ਇਹ ਆ ਜੋਤ ਠੀਕ ਹੈ ਸੁਰਗਿੱਤੀ ਹੈ ਖੰਡ ਬ੍ਰਾਂਡਰ ਤੇ ਗੱਲ ਜੋਤ ਪਹਿਲਾਂ ਬੈਠਾ ਹੁੰਦੀ ਹੈ ਸੰਸਾਰ ਦੀ ਰਚਨਾ ਤੋਂ ਪਹਿਲਾਂ ਬੈਠਾ ਹੋਇਆ ਜੋਤ ਜੋਤ ਵਾਸਤੇ ਤਿਆਰ ਕੀਤੀ ਗਿਆ ਆਤਮਾ ਆ ਜੋ ਸੱਚੇ ਦੇ ਪਵਨਾਂ ਤੇ ਆਪੋ ਤੇ ਜਲ ਹੋਏ ਜਲ ਤੇ ਤੇਰੇ ਪਵਨ ਸਾਜਿਆ ਜਿੰਨੇ ਜੋਤ ਵਾਸਤੇ ਬਣਾਏ ਨੇ ਜਿਹੜੇ ਉਹ ਮੇਰਾਮ ਨਾਲੇ ਬਣਾਏ ਨੇ ਨਾਮ ਨਾਲੇ ਮਾਇਆ ਪੈਦਾ ਹੋਈ ਐ ਨਾਮ ਨਾਲੇ ਪਹਿਲਾਂ ਜੇ ਅਸਰੇ ਜੋਤ ਹੈ ਠੀਕ ਇਹਸ ਕਰਕੇ ਜੋਤ ਪਹਿਲੇ ਉੱਪਰ ਤੇ ਰੱਖੀ ਐ ਗਾਂਵਾਚੇ ਰੱਖਣਗੇ ਹਾਂਜੀ ਹਾਂਜੀ ਪਹਿਲਾਂ ਤਾਰੇ ਸਗਲੇ ਜੰਤ ਜੰਤ ਦਾ ਮਤਲਬ ਜਿੰਨੇ ਜੀਵ ਜਨਾਂ ਵਿੱਚ ਜੋਤ ਹੈ ਜੀ ਆਹ ਜੋਤ ਜੀਵ ਉਹਦੇ ਅਸਰੇ ਖੜੇ ਨਾਮ ਦੇ ਅਸਰੇ ਤੇ ਨਾਮ ਕੇ ਤਾਰੇ ਖੰਡ ਇਹਦੇ ਅੰਦਰ ਜੰਤ ਜਿਹੜਾ ਹੈਗਾ ਖੰਡ ਹੋਇਆ ਹੋਇਆ ਹੈ ਜੀ ਹਾਂ ਠੀਕ ਹੈ ਤੇ ਖੰਡ ਔਰ ਬ੍ਰਹਮੰਡ ਦੋ ਅਲੱਗ-ਅਲੱਗ ਅੱਖਰ ਹੈ ਬ੍ਰਹਮੰਡ ਹੈ ਬ੍ਰਹਮੰਡ ਸਾਡਾ ਚਿੱਤ ਹੈ ਅੱਛਾ ਜੀ ਜਿੱਥੋਂ ਬਾਹਰ ਪੈਦਾ ਹੋਇਆ ਉਹ ਖੰਡ ਹੈ ਉਹਦਾ ਸਿਰਸਾ ਅੱਛਾ ਜੀ ਠੀਕ ਹੈ ਜੀ ਨਾਮ ਕੇ ਧਾਰੇ ਸਿਮਰਤ 베ਦ ਪੁਰਾਨ ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ਨਾਮ ਕੇ ਧਾਰੇ ਸਿਮਰਤ 베ਦ ਪੁਰਾਨ ਸਿਮਰਤ 베ਦ ਪੁਰਾਨ ਅਸਲ ਦੇ ਵਿੱਚ ਜਿਹੜੇ ਨੇ ਆਪਦੇ ਆਸ ਨਾਮ ਇਹਨਾਂ ਦਾ ਵੀ ਆਧਾਰ ਨਾਮ ਪਹਿਲੀ ਸਟੇਜ ਹੈ ਹਾਂ ਨਾ ਸਿਰ ਗਿਆਨ ਤੱਤ ਗਿਆਨ ਦਾ ਹਾਂਜੀ ਤੱਤ ਗਿਆਨ ਦੀ ਪਹਿਲੀ ਸਟੇਜ ਹੈ ਜਿਵੇਂ ਕੋਈ ਚੀਜ਼ ਆਪਾਂ ਪੈਦਾ ਕਰਦੇ ਹਾਂ ਗੰਨਾ ਪੈਦਾ ਹੁੰਦਾ ਹੈ ਹਾਂਜੀ ਗੰਨਾ ਫੇਰ ਪੈਦਾ ਹੁੰਦਾ ਹੈ ਕਾਫੀ ਦੇਰ ਬਾਅਦ ਉਸੇ ਬਿਠਾ ਦਾ ਪੈਦਾ ਹੁੰਦਾ ਫਿਰ ਹੂੰ ਬਿਠਾ ਦੇ ਵਿੱਚੋਂ ਗਰਗੋੜੇ ਅਸ਼ਤਰ ਕੀਤੇ ਜੋ ਵੀ ਬਣਦਾ ਬਣਦਾ ਉਹ ਸਟੇਜ ਹੈ ਦੇਸ਼ ਦੇ ਕਰਕੇ ਜਿਹੜਾ ਪਹਿਲਾ ਗਿਆਨ ਹੈ ਪਹਿਲਾ ਗਿਆਨ ਸਿਫਰ ਤੋਂ ਬੇਦਪੁਰਾ ਨਾਲ ਉਹ ਤੋਂ ਬਾਅਦ ਸੱਤ ਗਿਆਨ ਆ ਰਿਹਾ ਹੈ ਠੀਕ ਹੈ ਜੀ ਜਿਵੇਂ ਪ੍ਰਾਇਮਰੀ ਕਲਾਸ ਹੈ ਉਹ ਵੀ ਪੜ੍ਹਾਈ ਹੈ ਬੀਡਰ ਕਲਾਸ ਹਾਈ ਸਕੂਲ ਦੀ ਪੜ੍ਹਾਈ ਹੈ ਫਿਰ ਕਾਲਜ ਦੀ ਪੜ੍ਹਾਈ ਹੈ ਫਿਰ ਯੂਨੀਵਰਸਿਟੀ ਦੀ ਪੜ੍ਹਾਈ ਹੈ ਹਾਂ ਉਹਨੇ ਥੱਲੇ ਦੀ ਪੜ੍ਹਾਈ ਹੈ ਨਾ ਉਹ ਅਸਲ ਦੇ ਵਿੱਚ ਯੂਨੀਵਰਸਿਟੀ ਤੱਕ ਪਹੁੰਚਣ ਵਾਸਤੇ ਉਹ ਵੀ ਪੜ੍ਹਾਈ ਜ਼ਰੂਰੀ ਹੈ ਵਨਾ ਦਾ ਉਹ ਵੀ ਪੜ੍ਹਾਈ ਹੋਈ ਹੈ 9 ਸਬ ਦਾ ਪੜ੍ਹਾਈ ਹੈ ਠੀਕ ਹੈ ਜੀ ਸਭ ਦਾ ਗਿਆਨ ਸਭ ਸੱਚਾ ਗਿਆਨ ਹੈ ਹਾਂ ਪਰ ਟਾਰਗੇਟ ਕੀ ਸੀ ਟਾਰਗੇਟ ਯੂਨੀਵਰਸਿਟੀ ਕੋਲ ਟਾਰਗੇਟ ਸੀਗਾ ਹਾਂ ਜੀ ਤੇ ਟਾਰਗੇਟ ਸੀ ਕਿਸੇ ਬੁੱਧੇ ਦਾ ਚੱਲਿਆ ਦਾ ਪ੍ਰਾਇਮਰੀ ਤੇ ਉਹ ਨਾਮ ਕਰਕੇ ਹੀ ਚੱਲੇ ਨੇ ਥੱਲੇ ਤੇ ਵੀ ਸੀ ਤੋਂ ਜਿਹੜੇ ਚੱਲੇ ਨੇ 84 ਲੱਖ ਜੁਮ ਜਿੱਦੀ ਅਸੀਂ ਲਈ ਹੈ ਜਿੱਦੀ ਤੇ ਅਸੀਂ ਅਗਲਾ ਵਾਰ ਮੁਕਤੀਯ ਜੁਗਾਤੀ ਲਖ ਜਹੂਰ ਅਹਹ ਅਬੀ ਜੋ ਜਾਨਾ ਲੈ ਪਸ਼ੂ ਪੰਛੀ ਬਿਰਖ ਅਸਾਬਰ ਬਹੁਤ ਜੀਉਂਦ ਪਰ ਬਲਟ ਭਾਰੀ ਇਹ ਜੋਨਾ ਚ ਵੀ ਪੜਾਈ ਹੋਈ ਹੈ ਇਹ ਜੋਨਾ ਚ ਡਿਵੈਲਪਮੈਂਟ ਬੁੱਧੀ ਵੀ ਹੋਈ ਹੈ ਪਰ ਉੱਥੇ ਐ ਜੀ ਪੜਾਈ ਨਹੀਂ ਆ ਜੀ ਆਦਮੀ ਦੇ ਹੂੰ ਹਿਓ ਤੇ ਗਾਂਹਾਂ ਦੇ ਕੋਰਤੀਦੂ ਯਾਰ ਉੱਥੇ ਤੇ ਮੜਿਆ ਪਰ ਇੱਥੇ ਆ ਕੇ ਓਰਿਜਨਲ ਲਗਿਆ ਨਾ ਆਲਮੀ ਜੋਨਾ ਕੇ ਠੀਕ ਹੈ ਉਹ ਸਗਲੇ ਜੰਤ ਜਿਹੜਾ ਚੱਲਿਆ ਉਥੋਂ ਚੱਲਿਆ ਚੱਲ ਰਿਹਾ ਆਲਮੀ ਦੀ ਗੱਲ ਰਹੀ ਹੈ ਲੋਕ ਕਿ ਤੁਹਾਡੇ ਸਗਲੇ ਜੰਤ ਉਹ ਜੱਤ ਵਾਲੀ ਗੱਲ ਥੱਲੇੋਂ ਚੱਲੀ ਹੋਈ ਹੈ ਪਹਿਲੇ ਯੁੱਗ ਤੋਂ ਲੈ ਕੇ ਚੱਲੀ ਹੋਈ ਹੈ ਪਹਿਲੇ ਯੁੱਗ ਤੋਂ ਜਾਇ ਅਸੀਂ ਚੱਲੇ ਹਾਂ ਮਹਾਰੀ ਜੋ ਆਲਮੀ ਇਹ ਜੁਨਾ ਤੋਂ ਉਹ ਨਾਂ ਬਾਤ ਚੱਲਿਆ ਆ ਠੀਕ ਹੈ ਜੀ ਬਈ ਬਹੁਤ ਬੰਦਰ ਹੈ ਪਹਾੜ ਦੀ ਸਿਕਿਉਰਟੀ ਦੇ ਉੱਤੇ ਉਹਦੇ ਸੇੜੀਆਂ ਬਣਾਏ ਜਿੰਦੇ ਸੇੜੀਆਂ ਸਾਰੀਆਂ ਹੀ ਬਦਲ ਤੇ ਪਹੁੰਚਣ ਵਾਸਤੇ ਨੇ ਪਹਿਲੀ ਸਿੜੀ ਤੋਂ ਲੈ ਕੇ ਚਾਹੇ ਪਹਿਲੀ ਸਿੜੀ ਉਹ ਪੂਰੇ ਚੈਰ ਉੱਤੇ ਪਹੁੰਚਣ ਵਾਸਤੇ ਗਿਆ ਨਾ ਮੋਟਾ ਪਹੁੰਚਣ ਵਾਸਤੇ ਸਾਰੀਆਂ ਸੇੜੀਆਂ ਬਣਾਈਆਂ ਜਾਂਦੀਆਂ ਠੀਕ ਹੈ ਜੀ ਨਾਮ ਹੈ ਦਾ ਰਹਿਸਿਆ ਨਾ ਨਾ ਪੈਰਾ ਗਿਤੀਆਂ ਜਿਹੜੀਆਂ ਮੈਨਾਂ ਉਹਦੇ ਪੈਰਾ ਗਿਤੀਆਂ ਨਾਲ ਪ੍ਰਾਪਤੀ ਵਿਰੋਧੀ ਹੁੰਦੀਆਂ ਕੇ ਕਾਉਂਸਲ ਤੇ ਕੁੱਝ ਈ ਡਿਵੈਲਪ ਹੋ ਗਿਆ ਹੁੰਦੀ ਸੀ ਸਿਮਰਤ ਮੇਰ ਪ੍ਰਾਂਮੀ ਦੀ ਸੀੜੀ ਹੈ ਉਹ ਆਦਮੀ ਦੀ ਜੁੱਤੀ ਹੈ ਠੀਕ ਹੈ ਦੀ ਸੀੜੀ ਇਸ਼ਾਰਾ ਕਰਕੇ ਦੱਸ ਕੇ ਵੀ ਸਾਰੀ 81 ਲੱਖ ਜੁੱਤੀ ਹੈ ਉਕੇ ਸ੍ਰੀਮਦ ਸ੍ਰੀ ਪ੍ਰਾਨਖ ਲੋਟੋਂ ਥੱਲੇ ਵੀ ਖੜੀ ਐ ਪਰਬਤ ਗਿਆਨ ਤੋਂ ਥੱਲੇ ਵੀ ਥੱਲੇ ਦੀ ਸੀ ਵੀ ਐ ਤੂੰ ਹਾਂਜੀ ਥੱਲੇ ਦੀ ਸੀ ਢੀ ਉੱਪਰਲੀ ਢੀ ਦੇ ਨਾਲ ਖੜੀ ਐ ਠੀਕ ਐ ਜੀ ਦਾ ਗਿਆਨ ਗੁਰੂ ਜੀ ਦੇ ਨੂੰ ਸਾਰਾ ਸੀਗਾ ਗੁਰੂ ਸਾਹਿਬ ਸੀਗਾ ਹਾਂਜੀ ਸ੍ਰੀਮਦ ਦਾ ਗਿਆਨ ਕਬੀਰ ਨੂੰ ਸੀਗਾ ਜਦੋਂ ਤੇ ਪ੍ਰਮਾਣ ਦਾ ਜਦ ਗਿਆਨ ਪੂਰਾ ਹੋਕਾ ਹੈ ਨਾ ਤਾਂ ਹੀ ਵਰਗਿਆਨ ਸਭ ਚਲਦਾ ਹੋਣਾ ਆਇ ਨਹੀਂ ਸਕਦਾ ਇਹ ਵੀ ਹੈ ਥੱਲੇ ਥੱਲੇ ਗਿਆਨ ਥੱਲੇ ਦਾ ਇਹ ਗੱਲ ਬੰਦੀ ਹੈ ਔਰ ਜੇ ਥੱਲੇ ਵਾਲੇ ਨੂੰ ਨਾਲ ਨਹੀਂ ਜੋੜਦੇ ਥੱਲੇ ਦੀਆਂ ਹਟਾ ਦੇ ਬੀੜੀ ਰੱਖ ਦਿੰਦੇ ਹੂੰ ਹੂੰ ਸਿਧਰ ਵਾਲੀ ਪੌੜੀ ਔ ਪੌੜੀ ਸਿਧਰ ਵਾਲੀ ਤੇ ਜਦੋਂ ਚੜ੍ਹਦੀ ਆਉਂਦੀ ਥੱਲੇ ਦੀ ਪੌੜੀ ਹਾਂ ਥੱਲੇ ਦੀਆਂ ਪੌੜੀਆਂ ਤੋਂ ਹੀ ਆ ਰਹੇ ਨੇ ਸਾਰੇ ਚੜ੍ਹਦੇ ਹੋੜੀ ਹੋੜੀ ਹੋੜੀ ਹੋੜੀ ਹੂੰ ਹੂੰ ਵੀ ਦਸਵੀਂ ਚੋਂ ਹਾਂ ਨੇ ਲਈ ਅੱਜ ਪੰਜ ਮਹੀਨਾ ਦਾ ਸੁਝਾਅ ਕਿ ਮੈਂ ਰੂਕਦਾ ਹਾਂ ਹੂੰ ਹੂੰ ਇਹ ਇਹ ਨਹੀਂ ਸਰਦਾ ਤਾਂ ਆਇਆ ਵੀ ਰੋਸਦਾ ਠੀਕ ਹੈ ਜੀ ਸਮਰਤ ਵੇਦ ਪ੍ਰਾਨ ਇਹ ਲਿਖ ਦਿੱਤਾ ਹਾਂ ਹਾਂ ਕਿ ਨੂੰ ਨਾਮ ਨਾਲ ਜੋੜਦਾ ਨਾਮ ਨਾਲ ਕਿਉਂ ਜੋੜਦਾ ਇਹ ਇਹ ਦੱਸੋ ਪਹਿਲਾਂ ਹਾਂਜੀ ਕਰਤੀ ਇਹ ਤਾਂ ਉਹਨਾਂ ਨੇ ਕੀਤੀ ਹੈ ਵੀ ਉਹ ਵੀ ਨਾਮ ਦੇ ਧਾਰੇ ਹੋਈ ਉੜਿਆ ਕੇ ਵਾਹਨ ਸਰਦ ਵਿੱਚ ਗੱਲ ਤਾਂ ਇਹ ਦਿਖਣੀ ਏ ਉਹ ਗੁਰੂ ਸਾਹਿਬ ਜੋੜ ਰਹੇ ਨੇ ਤੁਸੀਂ ਤੋੜ ਰਹੇ ਹੋ ਇਹ ਲੋਕ ਤਾਂ ਸਿੱਖ ਤਾਂ ਸਿੱਖੀ ਤੋਂ ਹਜ਼ਾਰਾਂ ਕੋਹਣ ਚਲੇ ਗਏ ਹਾਂਜੀ ਇਹਾਂ ਕੀ ਦੁਖਲਤਾ ਇਹ ਰਾਜਗੀਰ ਕਹੇ ਤੇ ਸੰਪਰਦਾਇ ਇਹ ਸਿੱਖੀਆਂ ਨੂੰ ਸਿੱਖ ਸੰਭਲਦਾ ਹੀ ਹੁੰਦਾ ਹਾਂਜੀ ਸਿੱਖ ਕੱਲੇ ਆਏ ਸਿੱਖੀ ਨਾਮ ਕੇ ਸਗਲੇ ਜੰਤ ਨਾਮ ਕੇ ਤਾਰੇ ਅਖੰਡ ਬ੍ਰਹਮੰਡ ਨਾਮ ਕੇ ਤਾਰੇ ਸਮਰਤ ਬੇਦ ਪ੍ਰਾਣ ਆਪਕੇ ਤਾਰੇ ਸੁਣ ਗਿਆਨ ਤੇ ਆਣ ਕੋਣ ਸੁਣ ਕੋਈ ਵੀ ਸੁਣਦਾ ਸੀ ਵੀ ਸੁਣ ਕੋਈ ਵੀ ਸੁਣ ਸਿੱਖਾ ਨੂੰ ਕਲੇਆ ਨੂੰ ਕਿਹਾ ਸਾਰੇ ਜਗਨਾ ਜਿਹੜਾ ਸੁਣੂ ਦਾ ਸਿੱਖ ਹੋਆ ਜਿਹੜੇ ਸੁਣ ਨਹੀਂ ਸਿੱਖੇ ਦੀਆਂ ਹੋ ਠੀਕ ਇਹ ਸੰਪਰਦਾ ਅਜੀ ਹੋਵੇ ਸੰਪਰਦਾਇਕ ਅਹਲੋ ਹਨਾ ਅਜੀ ਹਾਂ ਉਹਨਾਂ ਨੂੰ ਅਜੀ ਉਹਦੇ ਇਸ ਦਾ ਮਨਾ ਬਲੇਸ ਕਿਟਾ ਗੁਰੂ ਘਰ ਦੇ ਉਹ ਨਹੀਂ ਹੱਸਦੇ ਆਸੋਣ ਉਹ ਥੱਪਾ ਬੈਠਦੇ ਰਹਿੰਦੇ ਅਸੀਂ ਤਾਂ ਹੋ ਸਕਦੇ ਉਹਦਾ ਕੋਈ ਬ੍ਰਿਲੀਅੰਟ ਅਨੁਭਵ ਕਿਹੜਾ ਹੋਊਗਾ ਬੰਦੇ ਪੜ੍ਹਨਗੇ ਹਾਈ ਸਕੂਲੋਂ ਫਿਰ ਪੜ੍ਹਨਗੇ ਹਾਈ ਸਕੂਲ ਨੂੰ ਪੂੜ ਕੇ ਕਾਲਜ ਜਾਊਗਾ ਜੇ ਹਾਈ ਸਕੂਲ ਕਾਲਜ ਕੌਣ ਜਾਊਗਾ ਥੱਲੇ ਦੀ ਪੜਾਈ ਕਰਾਉਣਗੇ ਸਭ ਤੋਂ ਬੇਦਰਪੁਰਾਂ ਵਾਲੇ ਕੇ ਆਊ ਸਾਡੇ ਕੋਲ ਤਾਂ ਇਹ ਦੇ ਸਾਨੂੰ ਚੋਦੀਆਂ ਦੀ ਗੁਰਬਾਣੀ ਇਹ ਤਾਂ ਬਹੁਤ ਵਿਰੋਧੀ ਹੋ ਗਏ ਸਾਨੂੰ ਇਹ ਤਾਂ ਗੁਰਬਾਣੀ ਦੇ ਅਰਥਾਂ ਵਿਰੋਧੀ ਕਿਉਂ ਨੇ ਹੂੰ ਇਹਨਾਂ ਥੱਲੇ ਦਾ ਪਤਾ ਹੀ ਨਹੀਂ ਥੱਲੇ ਕੀ ਹੈ ਥੱਲੇ ਦਾ ਜੀ ਕੀ ਹੈ ਹੂੰ ਹੂੰ ਆਪਾਂ ਨੂੰ ਸ਼ਾਮ ਨਾਮ ਦੀ ਗੱਲ ਉੱਥੇ ਵੀ ਕੀਤੀ ਹੋਈ ਹੈ। ਉਹ ਵੀ ਗਲਤ ਕਰਦੇ ਨੇ, ਵੀ ਜੇ ਨਾ ਰੋਣੇ ਇਦਾਂ ਕੀ ਕਰਦੇ। ਹੂੰ। ਉਹ ਰਾਮ ਦਾ ਉਹਨੂੰ ਬੋਲਦੇ। ਹਾਂ ਜੀ। ਕਿਹਾ ਸੀ। ਠੀਕ ਹੈ ਜੀ। ਹਰ ਹੋਇਆ ਉਹ ਸਭ ਦੀ ਲੋੜ ਸੀ। ਰਾਮ ਰਾਮ ਕਰਤਾ ਜਗ ਤੇਰੇ ਰਾਮ ਨੂੰ ਪਾਇਆ ਜਾਏ ਇਹ ਹੀ ਗੱਲ ਸੀ ਰਾਮ ਕਹਿਣ ਨੂੰ ਤੇਰੇ ਤੂੰ ਇੱਕ ਵਿਚਾਰ ਕੋਈ ਰਾਮ ਜਮਰ ਕਹੇ ਕੋਈ ਕੋਟ ਦਾ ਹਾਲ ਇਹ ਤੇ ਰਾਮ ਇਹਦੇ ਵਿੱਚ ਕੁਛ ਦਿੱਤਾ ਕਿ ਅੰਬੇਲ ਦੀ ਗੱਲ ਸੀ ਹਾਂਜੀ ਇੱਕ ਇੱਕ ਇੱਕ ਇੱਕ ਵੱਲ ਦਿੱਤਾ ਜਿਹੜੀ ਗੁਰਬਾਨੀ ਦੀ ਹੋਈ ਉਹ ਪਤਨੀ ਲਈ ਹੈ ਆਦਮੀ ਨੇ ਇਹਦੀ ਗੁਰਬਾਨੀ ਦੇ ਵਿੱਚ ਕਰ ਹੈ ਹਾਂ ਉਹ ਲੈ ਲੀਵੇ ਉਹ ਰੁਕ ਲਾ ਕੇ ਹਾਂ ਉਹ ਲਗਾਤੀ ਉਹ ਨੇ ਭਾਈ ਉਹਦਾ ਆਦੀ ਫਾਰਾ ਜੱਲੇ ਲਖਾਦੀ ਉਹਨੇ ਕਿ ਪਪੀ ਪਾਤੀ ਉਹਨੇ ਦਸ ਰਾਤ ਨਹੀਂ ਸਤੇ ਤੂੰ ਬਣੂਂਦੇ ਤੈਨੂੰ ਠੀਕ ਕਾਮਯਾਬ ਹੋ ਗਏ ਹਾਂਜੀ ਨਾਮ ਕੇ ਧਾਰੇ ਆਕਾਸ ਪਤਾਲ ਆਗਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ ਉਹ ਕਤਾਲ ਨਾਲ ਉਹਨੂੰ ਤਾਂ ਸ਼ਾਸਤਰ ਜਿਹਾ ਆਇਆ ਹੈ। ਉਹ ਵਲਿਗੀਏ ਦਾ ਜਿਹੜੀ ਭਾਰਖਾ ਆਈ ਦੇ ਟਪੋਈ ਜਿਹੜੇ ਸੀ ਗਲਤ ਦੇ ਅਸੀਂ ਉਹ ਅਰਥ ਬਦਲ ਲਏ। ਉਹਨਾਂ ਨੇ ਅਰਥ ਬਦਲਤੇ ਤੇ ਬੇੜ ਵਿੱਚੋਂ ਬਦਲ ਕੇ ਉਲਟੇ ਅਰਥ ਕਰ ਲੈ ਸੀ ਕੁਰਬਾਨੀ ਨੂੰ ਬਦਲ ਕੇ ਸਹੀ ਅਰਥ ਕਰਦੇ। ਇਹਨਾਂ ਦਾ ਫਰਕ ਜ਼ਰੂਰ ਹੈ। ਅਰ ਕੋ ਬ੍ਰਦਰਾਮ ਇਹਦੇ ਲਈ ਜਾਨੇ ਲਫਜ਼ ਉੱਥੋਂ ਹੀ ਆਏ ਹੋਏ ਨੇ ਹਾਂਜੀ ਇਹ ਸਤਫਨ ਉੱਥੇ ਹੀ ਹੈ ਨਾ ਹਾਂਜੀ ਗੜਬੜ ਹੈ ਗੜਬੜ ਦੂਰ ਕਰਦੀ ਆਪਾਂ ਜੀ ਗੜਬੜ ਕਿੱਥੋਂ ਪਈ ਹੈ ਜੀ ਨਾਮ ਤੇ ਤਾਂ ਆਕਾਸ਼ ਤੋਂ ਤਾਂ ਦੇ ਅਸਰੇ ਕਹਣਾ ਨਾਮ ਨੇ ਆਸਰੇ ਖੜਾ ਹੈ ਰਾਜਵੀਂ ਹੋਰ ਇਹ ਪੱਟਿਆ ਪ੍ਰਕਾਸ਼ ਨੂੰ ਲੱਗਾ ਸਵਾਲ ਸੀ ਤੇ ਨੇ ਸਵਾਲ ਕੀਤਾ ਫਰਦ ਨੂੰ ਹੋਰ ਇਹ ਪੱਟਿਆ ਅੰਬਰ ਕਾਸ਼ ਨੂੰ ਲੱਗਾ ਹੋਰ ਇਹ ਸਵਾਲ ਦਾ ਜਵਾਬ ਨਹੀਂ ਦਿੱਤਾ ਕਿਤੇ ਵੀ ਕਵੀਰ ਨੇ ਗੁਰਬਾਨ ਸਿੰਘ ਨੇ ਜਵਾਬ ਦਿੱਤਾ ਹੋਇਆ ਇੱਥੇ ਆ ਕੇ ਅਖਾਂ ਇਸੀ ਬਹੁਤੀ ੱੱਲੇ ਦੀ ਕੀਤੀ ਹੋਈ ਗੁਰਬਾਨੀ ਕਿਉਂ ਉਹ ਸਵਾਲ ਦਾ ਜਵਾਬ ਹੈ ਨਾ ਤੂਰੀਦਰ ਪਾਇਆ ਸੀ ਪੜਨ ਤੂੰ ਹੂੰ ਹੂੰ ਅੰਬਰ ਕਾਹਦਾ ਲੱਗਾ ਵੱਡੇ ਰੂਪਾਇਆ ਸੀ ਹੂੰ ਹੂੰ ਇਹ ਨਾਮ ਤੇ ਢਾਰੇ ਪਤਾਲ ਇਕੱਠਾ ਕਰਦੀਏ ਤਾਂ ਅੰਬਰ ਬਣਦਾ ਹੈ ਦਾ ਮਤਲਬ ਹੈ ਦਜ਼ਨ ਜਿਹੜਾ ਅੰਬਰ ਲਾਹੋ ਲੈਣਾ ਅੰਬਰ ਵਿੱਚ ਬਤਾਲ ਨਹੀਂ ਹੁੰਦਾ ਅੱਛਾ ਆ ਗਗਨ ਨਾਲ ਅਪਰਿਪਤਾਲ ਨਹੀਂ ਹੁੰਦਾ ਜਿਵੇਂ ਦਸ਼ਮਾ ਇਕੱਠਿਆਂ ਨੂੰ ਉੱਪਰ ਕਹਿੰਦੇ ਨੇ ਹੂੰ ਜਦ ਇਹ ਆਮਾ ਇਕੱਠਿਆਂ ਕਹਿੰਦੇ ਨੇ ਗਗਨ ਤੇ ਬਹੁਤ ਹੋ ਬਾਗਿਆ ਨਾਲ ਪਤਾਲ ਹੁੰਦਾ ਹੈ ਕਦਨ ਦੀ ਡੈਫੀਨੇਸ਼ਨ ਦਿੱਤੀ ਆ ਕਬੀਰ ਨੇ ਉਹ ਕਹਿੰਦਾ ਆਕਾਸ਼ ਗਗਨ ਪਤਾਲ ਗਗਨ ਪੈਰਾਂ ਦੇ ਥੱਲੇ ਵਾਲਾ ਜਿਹੜਾ ਆਕਾਸ਼ ਉਹ ਵੀ ਦਗਨੀ ਸਰਦੇ ਉੱਤੇ ਵਾਲਾ ਆਕਾਸ਼ ਹੈ ਜਿਹੜਾ ਪਾਟਾੜ ਹੁੰਦਾ ਥੱਲੇ ਵਾਲਾ ਦੇ ਥੱਲੇ ਵਾਲਾ ਜੋ ਪੁਲਾਣ ਹੈ ਉਹ ਵੀ ਦਗਨ ਹੈ ਸਰਦੇ ਉੱਤੇ ਵਾਲਾ ਆਕਾਸ਼ ਹੈ ਜਿਹੜਾ ਉਹ ਵੀ ਦਗਨ ਹੈ ਚਾਰ ਦਿਸ਼ਾਂ ਦਦਰ ਨਹੀਂ ਲੈ ਚਾਰੇ ਦਿਸ਼ਾਵਾਂ ਦੇ ਵਿੱਚ ਵਿੱਚ ਜਿਹੜਾ ਹੈ ਉਹ ਵੀ ਦਗਨ ਹੈ ਕਰਕੇ ਦਗਨ ਰਹੇ ਸਾਰਾ ਆਕਾਸ਼ ਵੀ ਉਹ ਅਕਾਸ਼ ਦੇ ਨਾਲ ਬਤਾਲ ਆਊਗਾ ਗगन ਅੰਬਰ ਦੇ ਨਾਲ ਹੋਤੀ ਕੁਛ ਅੰਬਰ ਬਸ ਦਸੇ ਦਿਸ਼ਾਵਾਂ ਖਤਰ ਲੱਗਦਾ ਅੰਬਰ ਹਾਂ ਜੀ ਸਾਡੇ ਕੋਲ ਲੱਗਦਾ ਪੋਰਾੜ ਹਾਂ ਜੀ ਉਲਾੜ ਨਾ ਬਣਦਾ ਹੁੰਦਾ ਹਾਂ ਹਾਂ ਦਸੇ ਦਿਸ਼ਾਵਾਂ ਹੁੰਦੀਆਂ ਨੇ ਹਾਂ ਹੈ ਪਾਸ਼ਾ ਦਾ ਸਾਨੂੰ ਬ੍ਰੀਤ ਗਿਆਨ ਹੋਣੀ ਚਾਹੀਦਾ ਕਿ ਜੇ ਕਿੰਜ ਰੂਪ ਕਿਸੇ ਭਾਸ਼ਾ ਚ ਲਿਖੀ ਹੋਈ ਨੂੰ ਹੂੰ ਜੇ ਜਿਹੜਾ ਗਿਆਨ ਭਾਸ਼ਾ ਚ ਲਿਖਿਆ ਜਾਣਾ ਨਾ ਹਾਂਜੀ ਜੋ ਭਾਸ਼ਾ ਦਾ ਡੀਪ ਗਿਆਨ ਨਹੀਂ ਤਾਂ ਉਹ ਪੂਰੀ ਗੱਲ ਆਉਣੀ ਸਾਡੇ ਪੂਰੀ ਗੱਲ ਸਮਝ ਤਾਂ ਜਿਆਦਾ ਸਲਈਆ ਪੂਰਾ ਭਾਸ਼ਾ ਦਾ ਗਿਆਨ ਵੀ ਹੋਵੇ ਠੀਕ ਦੀ ਆਪਣੀ ਗੁਰਮੁਖੀ ਭਾਸ਼ਾ ਹੈਗਾ ਸਾਨੂੰ ਡੀਪ ਗਿਆਨ ਨਹੀਂ ਹੈਗਾ ਸਾਡੀ ਦਿਖਲੀਆ ਦੇਖਿਦਰੀਆਂ ਦੇ ਵਿੱਚ ਇਹਦੇ ਅਰਥ ਹੋਲ ਨੇ ਕੀ ਜਾਂਦੇ ਉਹ ਅਰਥ ਡਿਫਾਈਨ ਕਰਦੇ ਗੁਰਬਾਣੀ ਚ ਅਸੀਂ ਉਹਨਾਂ ਵੱਲ ਧਿਆਨ ਨਹੀਂ ਦਿੱਤਾ ਜਿੰਨਾ ਜਦੋਂ ਗੁਰਬਾਣੀ ਦੇ ਅਰਥ ਨਹੀਂ ਲੈਂਦੇ ਅਸੀਂ ਉਹਦਾ ਜਦੋਂ ਕੁਝ ਨਹੀਂ ਆ ਸਕਦੀ ਹਾਂਜੀ ਹਾਂਜੀ ਨਾਮ ਕੇ ਧਾਰੇ ਆਕਾਸ ਆਗਾਸ ਪਤਲ ਨਾਮ ਕੇ ਧਾਰੇ ਸਗਲ ਆਕਾਰ ਆਕਾਰ ਆਕਾਰ ਹਾਂਜੀ ਸਾਰੇ ਜਿੰਨੇ ਆਤਮ ਆਤਾਰਕ ਜੋਗਾ ਧਰਤੀ ਉਪੀ ਆ ਗਈਆਂ ਕਿਉਂਕਿ ਆਤਾਰਕ ਮੈਟਰ ਮੈਟਰ ਹੂਗਾ ਕੱਲਾ ਉਹ ਚਾਹੇ ਸਰੀਰ ਬੁਢਾ ਹੈਗਾ ਚਾਹੇ ਜਾਂ ਦਸੂਰਜ ਦਾ ਸਰੀਰ ਹੈ ਕਾਸ ਦਾ ਵੀ ਆਤਾਰ ਦੇ ਵਿੱਚ ਮੈਟਰ ਹੈ ਮੈਟਰ ਦਾ ਆਨ ਜੋ ਜਲਾਕਾਰ ਜਲਾਕਾਰ ਦਾ ਮਤਲਬ ਇਹ ਨਹੀਂ ਹੁੰਦਾ ਕਿ ਵਸੂਦ ਵੀ ਉਹਦਾ ਹੈ ਜਿਹੜਾ ਕਹਾਣ ਦਾ ਮਤਲਬ ਆ ਉਹਦੇ ਅੱਖ ਕੰਨ ਨੱਕ ਵੱਖਰੇ ਵੱਖਰੇ ਨਹੀਂ ਹੁੰਦੇ ਡਿਜ਼ਾਈਨ ਕੀਤੇ ਹੋਏ ਨੇ ਸਾਡੇ ਦੇ ਆ ਉਹਦੇ ਦੀਆਂ ਸ਼ਕਤੀਆਂ ਹੁੰਦੀਆਂ ਨੇ ਸੂਰਜੰਤੀ ਸੁਭਾਅ ਸ਼ਕਤੀ ਬੋਲਣ ਸ਼ਕਤੀ ਕੁਝ ਕਰਨ ਦੀ ਸ਼ਕਤੀ ਇਹ ਸ਼ਕਤੀਆਂ ਨੇ ਉਹਦੇ ਵਿੱਚ ਹਾਂ ਕੋਈ ਉਹਦੇ ਵਿੱਚ ਹੈ ਗੁਰ ਵਕਰੇਵਾ ਹੈ ਅੰਦਰ ਹੀ ਹੈ ਸਾਡੇ ਅੰਦਰ ਨਾਲ ਅਸੀਂ ਉਹ ਕੰਮ ਕਰਦੇ ਆਂ ਸਰੀਰ ਜਿਹੜਾ ਬਾਹਰ ਦਾ ਹੈ ਅੰਦਰਲੇ ਉਹ ਤੇ ਗੁਰੂ ਇਸ ਕਰਕੇ ਬਿਨਾਂ ਸਾਰੀ ਤੇਹੀ ਦਾ ਗੁਰਾਂ ਦੇ ਅਸਰੇ ਹੀ ਗਿਆਨ ਲਿਆ ਜਾ ਸਕਦਾ ਗੁਰਾਂ ਦੇ ਅਸਰੇ ਹੀ ਉਹ ਸਮਝ ਆਉਂਦੀ ਉਹ ਤੇ ਗੁਰੇ ਜਾ ਸਕਦੇ ਨੇ ਗੁਰਾਂ ਦੇ ਹੀ ਉਹ ਸਮਝ ਜਾ ਸਕਦਾ ਦੇ ਇਹਨੂੰ ਗੋਣਾ ਚੋਈ ਸਭੀ ਆ ਯਾਰ ਸਮਝਾਇਆ ਜਾ ਸਕਦਾ ਇਹੀ ਕੰਮ ਗੁਰਮੁਖੀ ਕੀਤਾ ਹੋਇਆ ਹੈ। ਹਾਂਜੀ। ਠੀਕ ਹੈ। ਪਰ ਜਦੋਂ ਆਪਕ ਨੇ ਨਾਮ ਕਿ ਧਾਰੇ ਮਤਲਬ ਹੁਕਮ ਨਾਮ ਦਾ ਭਾਵ ਹੁਕਮ ਵੀ ਹੋ ਜਾਂਦਾ। ਅਜੇ ਹੁਕਮ ਹੋਰ ਕੀ ਹੈ? ਨਾਮ ਦਾ ਹੁਕਮ। ਠੀਕ ਹੈ ਜੀ। ਹਾਂ। ਹੁਕਮ। ਠੀਕ ਹੈ ਜੀ। ਨਾਮ ਕੇ ਅਜਿਹਾਾਨੂੰ ਡਿਫਾਈਨ ਕਰਤਾ ਇੱਕੋ ਨਾਮ ਕੀਆ ਹੁਕਮ ਹੈ ਗੁਰਸਤਗੁਰ ਦੀ ਆਬੁਝਾਈ ਦੀ ਬਸ ਠੀਕ ਹੈ ਜੀ ਜਿੱਤੇ ਮਰਜ਼ੀ ਅਸੀਂ ਇਹਨੂੰ ਉਪਦੇ ਤੌਰ ਤੇ ਵਰਤ ਲਿਆ ਜਿਸ ਮਰਜ਼ੀ ਨੂੰ ਗਿਆਨ ਦੇ ਤੌਰ ਤੇ ਵਰਤ ਲਈਏ ਠੀਕ ਹੈ ਇਹ ਅਸੀਂ ਦੇਖਣ ਪ੍ਰਕਾਰ ਕੀ ਹੈ ਠੀਕ ਹੈ ਜੀ ਦੇ ਹਿਸਾਬ ਨਾਲ ਅਸੀਂ ਇੱਥੇ ਇੱਥੇ ਪ੍ਰਕਾਰ ਨੇ ਸਿਰਫ ਹੁਕਮ ਵੀ ਇਹੀ ਹੈ ਗਿਆਨ ਵੀ ਇਹੀ ਹੈ ਕਿਥੇ ਦਾ ਅਰਥ ਗਿਆਨ ਉਹਦਾ ਕਿਥੇ ਦਾ ਹੁਕਮ ਉਹਦੀ ਬੁੱਧੀ ਸਾਨੂੰ ਚਾਹੀਦੀ ਹੈ ਹਾਂਜੀ ਠੀਕ ਹੈ ਜੀ ਨਾਮ ਕੇ ਧਾਰ ਕੇ ਪੁਰੀਆਂ ਸਭ ਭਵਨ ਨਾਮ ਕੈ ਸੰਗੀ ਸੁਨ ਸ੍ਰਵਣ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਜਿਹੜੀਆਂ ਪੁਰੀਆਂ ਨੇ ਪੂਰੀ ਹੁੰਦੀ ਹੈ ਇੱਕ ਅਵਸਥਾ ਅੱਛਾ ਜੀ ਸਾਡੇ ਗਿਆਨ ਦੀ ਜਿਹੜੀ ਅਵਸਥਾ ਪੌੜੀ ਹੈ ਅਵਸਥਾ ਪੌੜੀ ਹੁੰਦੀ ਕੀ ਆਂਦਾ ਜੋਗਮਾਤ ਦੀ ਕਪੜੀ ਵਾਸਤਾ ਹੂੰ ਹੂੰ ਉਹ ਤੇ ਪੂਰੀ ਲਗਿਆ ਹੈ ਸ਼ਿਪੂਰੀ ਹੂੰ ਹੂੰ ਉਹਨਾਂ ਸ਼ਿਪੂਰੀ ਕੇ ਆਇਆ ਸ਼ਿਪੂਰੀ ਕਹਿੰਦੇ ਨੇ ਯੋਗੀ ਹੂੰ ਜਿਹੜੀ ਯੋਗੀ ਵਾਸਤਾ ਇਹਨਾਂ ਦੀ ਸਮਾਧੀ ਦੀ ਵਾਸਤਾ ਨਾ ਜਿਹੜੀ ਸਮਾਧੀ ਲਾ ਕੇ ਬੈਠੇ ਆ ਉਹ ਵੀ ਸ਼ਿਪੂਰੀ ਕਹਿੰਦੇ ਸੀ ਸ਼ਿਪੂਰੀ ਚ ਵਸਦੇ ਨੇ ਸ਼ਿਵ ਦੀ ਸਮਾਧੀ ਹੈ ਨਾ ਅੱਛਾ ਜੀ ਪਰ ਮੈਂ ਨਾਲ ਇਸ ਪੁਰੇ ਨੂੰ ਬੰਦਿਆ ਨਹੀਂ ਹੋਇਆ ਕੁਰਬਾਨੀਆਂ ਪਰ ਉਹ ਤਾਂ ਕੈਦੇ ਦੇ ਦੋ। ਹੂੰ। ਸਾਡੀਆਂ ਜਿਹੜੀਆਂ ਅਸਲ ਦੇ ਵਿੱਚ ਪੂਰੀਆਂ ਉਹਨਾਂ ਦੀਆਂ ਜੇ ਨਾਮ ਤਾਂ ਪੂਰੀ ਦੀ ਰੀਤ। ਹੂੰ। ਭਵਨ ਦੇ ਨਾਮ ਨਾਲ ਹੀ ਪਵਨ ਹੁੰਦਾ ਹੁੰਦਾ। ਠੀਕ ਹੈ ਜੀ। ਜੇ ਪੂਰੀ ਹੈ ਭਵਨ। ਠੀਕ ਹੈ ਜੀ। ਦੇਸਾ ਜੇ ਹਿਰਦੇ ਜੇ ਗਿਆਨ ਵਸਦਾ ਤਾਂ ਤਬਦੀਲੀ ਹੈ ਹੂੰ ਹੂੰ ਜੇ ਤਬਦੀਲੀ ਗਾਲੋ ਮਨ ਵਿੱਚ ਤਬਦੀਲੀ ਗਾਲੋ ਬੰਦੇ ਅੰਦਰ ਐਸਾ ਬੰਦੇ ਅੰਦਰਲੀ ਸਪੇਸ ਹੈ ਜਿਹੜੀ ਉਹਨੂੰ ਹਿਰਦਾ ਕਹਿੰਦੇ ਨੇ ਠੀਕ ਹੈ ਤਬਦੀਲੀ ਆਉਣੀ ਆ ਮੰਨਦੇ ਅੰਦਰ ਤਬਦੀਲੀ ਆਉਣੀ ਹੈ ਹੂੰ ਤਬਦੀਲੀ ਆਉਤ ਆ ਵੀ ਨਾਲ ਠੀਕ ਹੈ ਜੀ ਬੰਦੇ ਜੇ ਤਬਦੀਲੀ ਆਈ ਇਸ ਤੇ ਤਬਦੀਲੀ ਆਈ ਨੀਹੀ ਗਿਆਨ ਵਾਲ ਹੋਇਆ ਤਰ ਹੋਇਆ ਠੀਕ ਹੈ ਅੰਦਰ ਹੈ ਸਾਡੇ ਅਸਲ ਦੇ ਵਿੱਚ ਬੈਠਾ ਬਾਹਰ ਸਰੀਰ ਤਾਂ ਉਹ ਵੀ ਚੱਲਦਾ ਜੇ ਮੈਂ ਅੰਦਰ ਚਲਾਉਂਦਾ ਇਹ ਇਸ ਕਰਕੇ ਪੂਰੀਆ ਭੁਲੇ ਇਹ ਭਗਵੰਤਾਲੋਂ ਨੂੰ ਕਹਾਂ ਕੁਰੀਆ ਚਾਲੂ ਉਹਨਾਪ ਦੀ ਗਿਆਨ ਅਵਸਥਾ ਦਾ ਲੋਈ ਠੀਕ ਹੈ ਸਾਬ ਨਾਲ ਕੀਤਾ ਨਾ ਉੱਥੇ ਵੀ ਨਾਮ ਦੇ ਦੇ ਬਿਲਕੁਲ ਕੀਤੇ ਹੋਏ ਨੇ ਉੱਥੇ ਵੀ ਹੁਕਮ ਨੇ ਐ ਫਿਰ ਹੁਕਮ ਨੇ ਸਾਡੇ ਅੰਦਰ ਉਹ ਸੋਜੀ ਅੰਦਰੇ ਦੇ ਰਿਹਾ ਠੀਕ ਹੈ ਜੀ ਮਿਲ ਲਈ ਹੈ ਉਹ ਪੂਰੀ ਨਾਲ ਚ ਪਵਨਾ ਤੇ ਬਾਹਰ ਨਾ ਉਗਣੀ ਹੈ ਰਾਖ ਤੇ ਠੀਕ ਹੈ ਜੀ ਆਹ ਉਧਰ ਮਿਲ ਲਈ ਹੈ ਨਾਲੇ ਜੀ ਨੇ ਲੈਣੀ ਉਹ ਵੀ ਅੰਦਰੇ ਉਹ ਕਿਤੇ ਬਾਹਰ ਹੈ ਤੇ ਜੋਤੀ ਉੱਥੇ ਤੇ ਨਾਲ ਵੀ ਉਹ ਕੋਲ ਹੂੰ ਪੁਰੀਆਂ ਸਭ ਸਭ ਭਵਨ ਅੱਗੇ ਰੋਗ ਕ ਨਾਮ ਇੱਥੇ ਪਹਿਲੀ ਵਾਰ ਕਹਿ ਆ ਗਿਆ ਨਾਮ ਕੈ ਸੰਗੀ ਉਦਰੇ ਸੁਨ ਸ੍ਰਵਣ ਇਹ ਨਾਮ ਦੀ ਜ਼ਿੰਦਤ ਕਰਕੇ ਅੱਛਾ ਜੀ ਪਾਲੀ ਚੰਦ ਕੇ ਜਿਹੜੇ ਦੀ ਵੀ ਨਾ ਸਾਰੇ ਅਸੀਂ ਬਾਣੇ ਵਿੱਚ ਚੱਲ ਕੇ ਤੇ ਉਪੜੇਆਂ ਬਲੁਖਾ ਜਲਬ ਤੱਕ ਹਾਂਜੀ ਲੋਕਾਂ ਨੂੰ ਦੀ ਸੁੱਧਤ ਕਰਕੇ ਉਹ ਕੋਣ ਚੱਲ ਕੇ ਹਾਂਜੀ ਸੰਗੀ ਉਦਰੇ ਸੁਣ ਸ਼ਰਵਣ ਜਗੀ ਲੈ ਕੇ ਨਾਮ ਨਾਲ ਚੱਲ ਕੇ ਸੁਣੀ ਸ਼ਰਵਣ ਕੋਣ ਸੁਣਦੇ ਆ ਸਰਵਡ ਕਰਦੇ ਆ ਅਸੀਂ ਹੂੰ ਸੁਣਦਾ ਆ ਜਿਹੜਾ ਹੁੰਦਾ ਹੂੰ ਗੁਰਬਾਣੀ ਦੇ ਵਿੱਚ ਨਾਮ ਸਮਾਇਆ ਹੋਇਆ ਹੂੰ ਗੁਰਬਾਣੀ ਸਰਵਡ ਨਹੀਂ ਸੁਣੀ ਜਾਊਗੀ ਜੀ ਜੇ ਤਾਂ ਸਰਵਡ ਜੇ ਤਾਂ ਸਰੂਕਾ ਸਰਵਡ ਹੂੰ ਬਿਨਾਂ ਪਹਿਲਾਂ ਤੋਂ ਜਿਹੜੇ ਬਿਨਾਂ ਪਹਿਲਾਂ ਤੋਂ ਬਾਣੀ ਸੁਣਦੇ ਨੇ ਉਹਨਾਂ ਤੇ ਅਸਰ ਕਰਦੀ ਆ ਜਿਹੜੇ ਕਲਾ ਨਾਲ ਸੁਣਦੇ ਉਹਨਾਂ ਤੇ ਨਹੀਂ ਅਸਰ ਕਰਦੀ ਹੂੰ ਜਿਹੜੇ ਬਿਨਾਂ ਕੰਨਾਂ ਦੇ ਸੁਣਦੇ ਨੇ ਉਹ ਉੱਧਰ ਬੈਠ ਕੇ ਇੱਕ ਵਾਰੀ ਚਿੱਤੋ ਕੇ ਸੁਣਦੇ ਨੇ ਉੱਧਰਲੇ ਚਿੱਤਾਂ ਵਾਲੇ ਕੰਨਾਂ ਨਾਲ ਸੁਣਦੇ ਨੇ ਉਹ ਉੱਧਰਲੇ ਚਿੱਤ ਕੋ ਕਰਨ ਦੇ ਹੂੰ ਪਾਲ ਕੋਲ ਇਹ ਨਾਲ ਸੁਰਤ ਜੁੜ ਕੇ ਸੁਣਦੀ ਆ ਉੱਧਰਲੇ ਕੰਨ ਜਿਹੜੇ ਨੇ ਚਿੱਤ ਦੇ ਨੇ ਉਹਦੇ ਕੋਲ ਨੇ ਠੀਕ ਉਹਦੇ ਨਾਲ ਜੁੜ ਕੇ ਸੁਣਾ ਤਾਂ ਫਿਰ ਪਊ ਗੱਲ ਹਿੰਦੀ ਉਹ ਗਾ ਜਾਂ ਸਰਵੰਨ ਕਰੂਗਾ ਹਾਂ ਉਹਦਾ ਆ ਰੋਗਾ ਹੀ ਹੰਦਾ ਸਰਵੰਨ ਕਰਮਾ ਲੈਦਾ ਆ ਰੋਗਾ ਹਿੰਦੀ ਉਹ ਨੂੰ ਘਰ ਬਚਾਰੂਗਾ ਹੂੰ ਦੁਨਤੇ ਵਿਚਾਰੀ ਉਹੀ ਗੱਲ ਜਾਂਦੀ ਹੈ ਜਦੋਂ ਇੱਕ ਬੰਦੇ ਜਿੱਤੋ ਕੇ ਹੁੰਦਾ ਹੈ ਫਿਰ ਤੇ ਅਸਰ ਪਾਉਂਦੀ ਹੈ ਫਿਰ ਬਚਾਉਂਦਾ ਫਿਰ ਫਿਰ ਕਹਿੰਦਾ ਵੀ ਆ ਗੱਲ ਹੈ ਵੀ ਇਹ ਤਾਂ ਤਫਸੀਲੀ ਲੈਣੀ ਪਊ ਆਪਾਂ ਨਾ ਨਾਰਾ ਬਦਲਣਾ ਪਊ ਨਹੀਂ ਤਾਂ ਨਾਰਾ ਬੰਨ ਜਿਵੇਂ ਨਮੀ ਜਲੇ ਜਾਉ। ਇਹ 500 ਦਾ ਪਰਵਾਹ ਨਹੀਂ ਕਰਦਾ। ਉਹ ਕਹਿੰਦਾ ਛੱਡੋ ਜੀ ਇਹਦੇ ਸਰਦਾ ਹੈ। ਕੌਣ ਚੱਲੂ ਪਾਣੀ ਨਾਲ? ਚੱਲ ਸਕਦੇ ਸਰਕਾਰ। ਛੱਡ ਦਿੰਦੇ। ਮਾੜ ਆਪਣੇ ਲੈਵਲ ਤੇ ਫੈਸਲਾ ਲੈ ਲੈਂਦਾ। ਹਾਂ। ਹਾਂ ਸੁਣਨਾ ਫੈਸਲਾ ਵੀ ਕਰਨਾ ਹੈ ਫੈਸਲਾ ਬੁੱਧੀ ਦੇ ਜਾਂਦਾ। ਬੁਲੜੀ ਦਾ ਬੁਲੜੀ ਦਾ ਫੈਸਲਾ ਤੁਸੀਂ ਦੇ ਸਕਦੇ ਠੀਕ ਜੇ ਬੰ ਕੱਲਾ ਸੁਣਦਾ ਕੱਲਾ ਹੀ ਬਾਅਦ ਫੈਸਲਾ ਦੇ ਦਿੰਦਾ ਬਸ ਹਾਂਜੀ ਜਿੱਥੇ ਵੀ ਅੱਖਰ ਨਾਮ ਕੈ ਰੰਗ ਨਾਮ ਇਹ ਆਊਗਾ ਮੈਂ ਨਾਮ ਕੈ ਰੰਗ ਨਹੀਂ ਆਉਂਦਾ ਨਾਮ ਕੈ ਰੰਗ ਤੇ ਨਾਮ ਕੈ ਸੰਗ ਸੰਗੀ ਤੇ ਰੰਗੀ ਆਹ ਤੈ ਨਾਮ ਦੁਆਰਾ ਰੰਗੀ ਹੋਈ ਸਾਹ ਤਾਂ ਇਹਨਾਂ ਕੈ ਨਾਲ ਕਾਰ ਕਿਉਂ ਡੇ ਇੱਕ ਲਾਹੂ ਹੂੰ ਕੇ ਆਪਾਂ ਕਹਿੰਦੇ ਹਾਂ ਨਾ ਦਰੂਦ ਦੇ ਹੂੰ ਜਦਿੱਕ ਹੋਰ ਆਮ ਨਾਲ ਅੱਜ ਹੋ ਗਿਆ ਕਾਰ ਖੋਰ ਜੁੜ ਗਿਆ ਹਾਂਜੀ ਆ ਹੈ ਇੱਕ ਜਿਵੇਂ ਇੱਕ ਸਿਆਰੀ ਦੇ ਨਾਲ ਸਹੀ ਜਗ੍ਹਾ ਵਿਹਾਰੀ ਲੱਗ ਕੇ ਕਾਰਖ ਲੱਗਿਆ ਹੋਇਆ ਦੋ ਸਿਆਰੀ ਦੀ ਵਿਹਾਰੀ ਹੋ ਜਾਂਦੀ ਹੈ ठीक है रंगी नाल आंदा एक जगह कैद आला नाम कै आधारा बेपरवा रहत है स्वामी नाम कै आधारा हां नाम ले धार करके ठीक है जी नाम रोदर अर्पण आके हां जी हां जी कर कृपा जिस अपने नाम लाए नानक चौथे पद में सो जन गत पाए ਤਰੀ ਕਿਰਪਾ ਤੇਰੀ ਕਿਰਪਾ ਜਿਸ ਆਪਣੇ ਨਾਮ ਲਾਏ ਹਾਂਜੀ ਤਾਂ ਕਰਪਾ ਨਹੀਂ ਹੋ ਸਕ ਠੀਕ ਹੈ ਜੀ ਕਰ ਕਰਪਾ ਤਾਂ ਇਹ ਕਰੂਗਾ ਕਿਰਪਾ ਕਲ ਹੋਈ ਠੀਕ ਹੈ ਜਿਹਨੂੰ ਨਾਮ ਲਾਤਾ ਉਹਤੇ ਕਿਰਪਾ ਹੋ ਚੁੱਕੀ ਹੂੰ ਹੂੰ ਅਰੀਦਾ ਹੋ ਚੁੱਕੀ ਜਰ ਤੋਦ ਤੇ ਕਰ ਦਿੱਤੀ ਗਈ ਹੈ ਕਿਰਪਾ ਹੋ ਚੁੱਕੀ ਹੈ ਜਰਪਾ ਠੀਕ ਹੈ ਕਰ ਕਰਪਾ ਦਾ ਮੰਗ ਰਿਹਾ ਜੋ ਕਿਰਪਾ ਗੱਲੇ ਰੋ ਕਾਲੀ ਪਰ ਰਲਦੇ ਨੂੰ ਸੇ ਕਰਪਾ ਕਰੀ ਕਿਰਪਾ ਠੀਕ ਹੈ ਜੀ ਕਰੀ ਕਿਰਪਾ ਜਿਸ ਆਪਣੇ ਕਰ ਕਰਪਾ ਕਰ ਕਰਪਾ ਦਾ ਤਾਂ ਫਿਰ ਜਿਹੜੇ ਹਿੱਦੀ ਪਰ ਸ਼ਾਸਤਰੀ ਕੋਲ ਅਸੀਂ ਇਹ ਗੱਲ ਕੋਲੋਂ ਦੱਸੀਏ ਉਹ ਕਹੂਗਾ ਗਲਤ ਪੜ੍ਹਦੇ ਹੋ ਇਹ ਬੈਲ ਛੋੜ ਨਵੇਂ ਉਹ ਠੀਕ ਅਰਥ ਆਪਣੇ ਹਿਸਾਬ ਨਾਲ ਠੀਕ ਕੱਢੂਗਾ ਉਹ ਦੋਗਾ ਵੇ ਜੋ ਕਿਰਪਾ ਬੱਗਦੇ ਉਹ ਨਾਮ ਤਾਂ ਪਹਿਲਾਂ ਲੱਗ ਗਿਆ ਫਿਰ ਕਿਰਪਾ ਦੀ ਕੀ ਲੋੜ ਰਹੀ ਹੂੰ ਠੀਕ ਹੈ ਜੀ ਜਿਸ ਦਾ ਨਾਮ ਲੱਗ ਗਿਆ ਉਹ ਨਾਨਕ ਚੌਥੇ ਪਦਮੈ ਸੋ ਜਨ ਗਤੀ ਪਾਈ ਗਤ ਪਾਈ ਹੂੰ ਚੌਥੇ ਪਦਮੈ ਤੂੰ ਜਾਣਾ ਜਾਂਦਾ ਉੱਤੇ ਉੱਤੇ ਰਹਿਣ ਨਾਲ ਰੁਕਦਾ ਨਹੀਂ ਹੈ ਸਾਰੀ ਖੇਡਦਾ ਇੱਥੇ ਪਤਾ ਲੱਗ ਗਿਆ ਨਰਾਕਾਰੀ ਖੇਡਦਾ ਕਹਾਂ ਜਾ ਕੇ ਬਹੁਤ ਪੁੱਛਾਈ ਜਣੇ ਇੱਥੇ ਸਵਾਲ ਲੈਦਾ ਸਾਡੇ ਇੱਥੇ ਦੇ ਜਿਹੜੇ ਸਵਾਲ ਨੇ ਕਿਉਂ ਆਏ ਕਿਉਂ ਸਾਰੀ ਕਿਉਂ ਦਾ ਜਵਾਬ ਫਿਰ ਉੱਥੇ ਹੈ ਕਿ ਉੱਥੇ ਸਾਰੀ ਕਿਉਂ ਇੱਥੇ ਆ ਜਣੀ ਅਸੀਂ ਪਹਿਲਾਂ ਕਿਉਂ ਕਰ ਦਿੰਦੇ ਨਾ ਕਿਉਂ ਹੈ ਉਹ ਚੌਥੇ ਪਾਦਾਂ ਨਾਲ ਕਿਉਂ ਜਵਾਬ ਉੱਥੇ ਨਹੀਂ ਮਿਲ ਜਾਂਦੇ ਉੱਥੇ ਗੱਲ ਪਾਇਆ ਸਾਕੇ ਦੇ ਪੋਵਰਾ ਤੇ ਆ ਬੋਵਨਾ ਤੇ ਚੱਲ ਹੋਏ ਉੱਥੇ ਦੀ ਗੱਲ ਹੈ ਇੱਥੇ ਦੀ ਗੱਲ ਨਹੀਂ ਠੀਕ ਹੈ ਹਾਂ ਉੱਥੇ ਉੱਥੇ ਜਾ ਕੇ ਦੱਸੀਏ ਗੱਲ ਇੱਥੇ ਨਹੀਂ ਦੱਸ ਇੱਥੇ ਕਿਵੇਂ ਦੱਸ ਦੂਗਾ